ਆਹ ਤੇਰੀ ਤੈਨੂੰ ਸੇਵਾ ਦਿਆਂਗੇ ਸਤਗੁਰਾਂ ਨੇ ਹਵੇਸ਼ਾ ਮਨੁੱਖ ਦੀ ਬਿਰਤੀ ਤੇ ਦ੍ਰਿਸ਼ਟੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਇਹ ਮੰਨ ਗਿਆ ਸਤਬਚਨ ਕਹਿ ਦਿੱਤਾ ਸਤਗੁਰਾਂ ਨੇ ਬਾਦਰ ਸਿੰਘ ਜੀ ਨੂੰ ਹੁਕਮ ਕੀਤਾ ਕਿ ਇਹਨੂੰ ਭਜਨ ਦੇ ਦਿਓ ਸੰਤਾ ਬਾਦਰ ਸਿੰਘ ਜੀ ਨੇ ਕੰਨ ਵਿੱਚ ਭਜਨ ਦਿੱਤਾ ਤੇ ਕੈਮ ਰਹੀਂ ਜਰਾ ਇਹਨ ਸਤਿਵਚਨ ਆਖਿਆ ਤੇ ਮਰੇਲ ਲੈ ਕੇ ਸਤਗੁਰਾਂ ਨੂੰ ਭੇਟਾ ਕੀਤੇ ਸੱਚੇ ਪਾਤਸ਼ਾਹ ਆ ਗਏ ਇਥੋਂ ਇਹ ਹੋਰ ਪ੍ਰਭਾਵਿਤ ਹੋਇਆ ਇਸ ਤੋਂ ਬਾਅਦ ਜਦੋਂ ਮੈਂ ਕਿਤੇ ਭੀੜ ਵਿੱਚ ਦਰਸ਼ਨ ਕਰਨ ਜਾਂਦਾ ਤੇ ਕੀਰਤਨ ਹੁੰਦਾ ਸੀ ਜਦੋਂ ਤੇ ਸੱਚੇ ਪਾਤਸ਼ਾਹ ਇਸ਼ਾਰੇ ਨਾਲ ਇਹਨੂੰ ਕੀਰਤਨ ਵਾਲਿਆਂ ਦੇ ਲਾਗੇ ਬਹਿਣ ਵਾਸਤੇ ਹੁਕਮ ਕਰਦੇ ਥੋੜਾ ਜਿਆ ਸਤਗੁਰਾਂ ਦੇ ਨੇੜੇ ਹੋ ਗਿਆ ਪਈ ਇਹਦਾ ਬਿਰਤੀ ਬਦਲ ਜਾਏ ਕਰਦਿਆਂ ਕਰਦਿਆਂ ਸੰਗਤ ਕਰਦਿਆਂ ਹੋਇਆਂ ਵੀ ਥੋੜਾ ਚਿਰ ਇਸ ਤਰ੍ਹਾਂ ਬੀਤੇ ਤੇ ਸੰਗਤ ਇਹਨੂੰ ਫੇਰ ਕੁ ਸੰਗਤ ਵਿੱਚ ਫਸ ਗਿਆ ਅਮਲੀਆਂ ਦੀ ਤੇ ਫੇਰ ਹੁੱਕਾ ਪੀਣ ਲੱਗ ਪਿਆ ਤੇ ਚੋਰੀ ਛਿਪੀ ਹੁੱਕਾ ਪੀਆ ਕਰ ਜਿਸ ਵੇਲੇ ਹੁੱਕਾ ਪੀਣ ਲੱਗ ਪਿਆ ਤੇ ਇੱਕ ਦਿਨ ਰਾਤ ਨੂੰ ਸ਼ਹੀਦਾਂ ਗੁਪਤ ਸ਼ਹੀਦਾਂ ਨੇ ਇਹਨੂੰ ਚੰਗਾ ਕੁਟਿਆ ਅਕਿ ਮਾਰ ਪਈ ਬਹੁਤ ਸਵੇਰੇ ਉੱਠਿਆ ਉੱਠ ਕੇ ਬੀੜ ਵਿੱਚ ਆਇਆ ਸਤਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਤੇ ਉੱਚੀ ਉੱਚੀ ਰੋਇਆ ਸਤਗੁਰਾਂ ਪੁੱਛਿਆ ਹੋਇਆ ਕੀ ਐ ਬੇਨਤੀ ਕੀਤੀ ਸੱਚੇ ਪਾਤਸ਼ਾਹ ਜਰਾਤ ਮੈਨੂੰ ਸ਼ਹੀਦਾਂ ਨੇ ਬੜਾ ਕੁੱਟਿਆ ਮੈਂ ਗਲਤੀ ਕੀਤੀ ਸੀ ਮੈਂ ਭੁੱਲ ਗਿਆ ਸਾਂ ਮੈਂ ਹੁੱਕਾ ਫੇਰ ਪੀਣ ਲੱਗ ਪਿਆ ਸਾਂ ਤੇ ਉਹਨਾਂ ਨੇ ਆਖਿਆ ਜਦ ਤੈ ਹੁੱਕਾ ਪੀਣਾ ਛੱਡ ਦੇ ਤੇ ਜਾਂ ਮੱਥਾ ਟੇਕਣਾ ਛੱਡ ਦੇ ਤੇ ਮੇਰੇ ਤੇ ਬਖਸ਼ਿਸ਼ ਕਰੋ ਮੈਂ ਤੁਹਾਰਾ ਨਹੀਂ ਐਸੀ ਗਲਤੀ ਕਰਾਂਗਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਆਖਿਆ ਸਿੰਘਾਂ ਨੂੰ ਹੁਕਮ ਕੀਤਾ ਭਈ ਇਸ ਤਰ੍ਹਾਂ ਕਰੋ ਅੰਮ੍ਰਿਤ ਤਿਆਰ ਕਰੋ ਇਹਨੂੰ ਅੱਜ ਪੱਕਿਆਂ ਕਰੀਏ ਅੰਮ੍ਰਿਤ ਤਿਆਰ ਕੀਤਾ ਗਿਆ ਦੋ ਕਿਸ਼ਾਰੇ ਮੰਗਾਏ ਅਸ਼ਨਾਣ ਕਰਵਾ ਕੇ ਕਿਸ਼ਾਰੇ ਪੁਆਏ ਅੰਮ੍ਰਿਤ ਛਕਾਇਆ ਅੰਮ੍ਰਿਤ ਛਕਾ ਕੇ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਇਹਨੂੰ ਪੱਕਿਆਂ ਕਰਨ ਵਾਸਤੇ ਇੱਕ ਮਹੀਨਾ ਡਿਊਟੀ ਲੱਗਦੀ ਬੀੜ ਵਿੱਚ ਰਹਿਣ ਦੀ ਸੇਵਾ ਕਰਨ ਦੀ ਇੱਕ ਮਹੀਨਾ ਇੱਥੇ ਰਹਿਣਾ ਸੇਵਾ ਕਰਨੀ ਹੈ ਤੇ ਨਾਮ ਬਦਲ ਦਿੱਤਾ ਕਿਰਪਾ ਰਾਮ ਤੋਂ ਕਿਰਪਾ ਸਿੰਘ ਨਾਮ ਕਰ ਦਿੱਤਾ ਸਿੰਘ ਬਣਾ ਦਿੱਤਾ ਕੇਸ ਰੱਖਣ ਦਾ ਹੁਕਮ ਕਰ ਦਿੱਤੇ ਲਾ ਦਿੱਤਾ ਕੇਸ ਰੱਖ ਲੈ ਸੇਵਾ ਕਰਨ ਲੱਗ ਪਿਆ ਤੇ ਸੇਵਾ ਕਰਦਿਆਂ ਕਰਦਿਆਂ ਫਿਰ ਐਸਾ ਮਨ ਬਣਿਆ ਫਿਰ ਘਰ ਜਾਣ ਨੂੰ ਜੀ ਨਾ ਕਰੇ ਜੇ ਭੀੜ ਚ ਰਹੇ ਤਾਂ ਵੀ ਸੇਵਾ ਕਰਨੀ ਜੇ ਕਿਤੇ ਭੈਣੀ ਸਾਹਿਬ ਆਵੇ ਤਾਂ ਵੀ ਸੇਵਾ ਕਰਨੀ ਇਹ ਕਿਰਪਾ ਸਿੰਘ ਕਿਰਪਾ ਰਾਮ ਤੋਂ ਬਣਿਆ ਹੋਇਆ ਤਗੜਾ ਸੇਵਕ ਬਣਿਆ ਸਤਿਗੁਰਾਂ ਦਾ ਹੁਣ ਸੇਵਕ ਇੱਥੋਂ ਤੱਕਰ ਬਣਿਆ ਕਿ ਆਪਣਾ ਤਨ ਮਨ ਧਨ ਸਭ ਅਰਪਿਤ ਕਰਨ ਵਾਸਤੇ ਤਿਆਰ ਹੋ ਗਿਆ ਇਸ ਨੇ ਵੇਖਿਆ ਅੰਤ ਸਮਾਂ ਨੇੜੇ ਆ ਗਿਆ ਬਿਰਧ ਹੋ ਗਿਆ ਤੇ ਵੇਖਿਆ ਪਤਾ ਨਹੀਂ ਮਨਾ ਸੋਚਿਆ ਮਨਾ ਪਤਾ ਨਹੀਂ ਜ਼ਿੰਦਗੀ ਤਸ ਦੇਣਿਆ ਕਿ ਮਹੀਨਾ ਕਿ 2 ਮਹੀਨੇ ਕਿ 6 ਮਹੀਨੇ ਹੈ ਕਿਉਂ ਨਾ ਹੁਣ ਦੁਨੀਆ ਵਿੱਚੋਂ ਲਾਹ ਖਟ ਕੇ ਚਲੀਏ ਇਸ ਨੇ ਨਾਬੇ ਚਾ ਕੇ ਆਪਣੀ ਜ਼ਾਇਦਾਦ ਮਕਾਨ ਦੁਕਾਨ ਧਨ ਸੰਪਦਾ ਸਭ ਸ੍ਰੀ ਭੈਣੀ ਸਾਹਿਬ ਲੋਹ ਦੇ ਨਾਲ ਲਿਖਾ ਦਿੱਤਾ ਆਪਣਾ ਤਨ ਮਨ ਧਨ ਸਭ ਅਰਪਿਤ ਕਰ ਦਿੱਤਾ ਸਤਿਗੁਰਾਂ ਨੂੰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਅੱਜ ਮੈਂ ਜਿਹੜਾ ਮੇਰੇ ਸਿਰ ਤੇ ਬੋਝ ਸੀ ਨਾ ਉਹ ਮੈਂ ਉਤਾਰ ਦਿੱਤਾ ਲਖਾ ਦਿੱਤਾ ਲੋਹ ਦੇ ਨਾਮ ਸਭ ਕੁਝ ਸੱਚੇ ਪਾਤਸ਼ਾਹ ਖਤ ਤੇਰੀ ਮਰਜ਼ੀ ਵਈ ਇਹ ਤੇ ਤੇਰੀ ਸ਼ਰਧਾ ਦੀ ਗੱਲ ਹੈ ਇਹ ਥੋੜੇ ਜਿਹੜਾ ਬਾਦ ਹੀ ਚੜਾਈ ਕਰ ਗਿਆ ਇਹਦੇ ਭੋਗ ਤੇ ਇਹਦੇ ਘਰੋਂ ਸੀ ਮਾਤਾ ਮਾਲਣ ਨਾਮ ਸੀ ਉਹਦਾ ਉਸ ਨੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ ਆਣ ਕੇ ਸੱਚੇ ਪਾਤਸ਼ਾਹ ਦਰਸ਼ਨ ਦੇਉ ਭੋਗ ਤੇ ਸਤਿਗੁਰੂ ਜੀ ਮਲੋਹ ਪਿੰਡ ਦਰਸ਼ਨ ਦਿੱਤੇ ਤੇ ਉਸ ਸਮੇਂ ਭੋਗ ਪੈਣ ਸਮੇਂ ਮਾਤਾ ਮਾਲਣ ਨੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਇੱਕ ਘੋੜੀ ਇੱਕ ਊਠਣੀ ਚਾਰ ਗਊਆਂ ਤੇ 18 ਸਟਾਂਕ ਸੋਨਾ ਯਾਨੀ ਇੱਕ ਸੇਰ ਤੇ ਦੋ ਛਟਾਂਗ ਸੋਨਾ ਜਿਹੜਾ ਰੈਣੀ ਕਰਕੇ ਰੱਖਿਆ ਸੀ ਇਟ ਬਣੀ ਹੋਈ ਸੀ